ਕਿ ਲੋਕ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖਿ ਉਬਰੇ ਜਿਨਨੀ ਸਤਿਨਾਮ ਚਿਤ ਲਾਇਆ ਇਹਦਾ ਬੋਹ ਹੈ ਹੋਇਆ ਸਰੀਰ ਪਹਿਲਾਂ ਪਾਇਆ ਗੱਲ ਇਹ ਲੈ ਲਿਆ ਅਸੀਂ ਇਹਦੇ ਨਾਲ ਸਾਡਾ ਹੈ ਜੋ ਕੋਈ ਐਸਾ ਸਭ ਬਹੁਤ ਉਜੋਗੀ ਹੋ ਗਿਆ ਜਿਹੋ ਵਾਇਰਟੀ ਕਰਾਉਂਦੇ ਉਹਨਾਂ ਦਾ ਤਾਂ ਆਪਣੀ ਸਰੀਰ ਨੂੰ ਬਹੁਤ ਪਰ ਆਦਮ ਨੂੰ ਗੱਲ ਹੈ ਮਮਤਾ ਲਈ ਆਪਣੀ ਸਰੀਰ ਦੀ ਹੁੰਦੀ ਹੈ ਬਹੁਤ ਕਹਿਣਾ ਨਹੀਂ ਦਈ ਰੂ ਸਰੀਰ ਕਰਕੇ ਮੈਂ ਕੱਢ ਮਮ ਉਚਾਰਤ ਪਿਆ ਦਿਵੰਦ ਮੈਂ ਕਹਿਣਾ ਤੈਨੂੰ ਦਵਨਾ ਹੋ ਗਿਆ ਮੈਂ ਉਹ ਲੈ ਗਿਆ ਤੂੰ ਤੂੰ ਕੋ ਲਗਿਆ ਮੈਂ ਰਹਿ ਗਿਆ ਜਦ ਹਮ ਹੋਤੇ ਤਬ ਤੂੰ ਬਣੀ ਤੇ ਹੁਣ ਤੂੰ ਆ ਫੇ ਬਣੀ ਰਹਿਣਾ ਅਬ ਖਾਇਆ ਮਮਤਾ ਖਾ ਲਿਆ ਪਰ ਬਿਰਦ ਦੰਦਾ ਤੇ ਜੇ ਤਾਂ ਹੁੰਦਾ ਸਰੀਰ ਦਾ ਉਹ ਤਾਂ ਖਾ ਖਾਦਾ ਜਾਂਦਾ ਦੰਦਾ ਨਾਲੇ ਖਾਦਾ ਜਿਹੜਾ ਮੇਰਾ ਕਾਰੀ ਸਰੀਰ ਖਾਦਾ ਅਕਲ ਖਾ ਲਈਏ ਦੀ ਇਹ ਅਕਲ ਦਾ ਨਾਸ ਹੋ ਗਿਆ ਜੋ ਕੰਮ ਕਰਨਾ ਆਇਆ ਤਾਂ ਉਹਦੀ ਕਰਦਾ ਜਿਹੜਾ ਕੰਮ ਕਰਦਾ ਹੈ ਉਹਦੇ ਚ ਫਲ ਕੋਈ ਨਹੀਂ ਮਿਲਣਾ ਅੱਗੇ ਜਾ ਕੇ ਇਹੀ ਗੱਲ ਹੈ ਜੋ ਫਲ ਮਿਲਣ ਵਾਲਾ ਕੰਮ ਕਰਦਾ ਦੀ ਅਕਲ ਦਾ ਹੀ ਨਾਸ ਹੋਇਆ ਗੁਰਮੁਖ ਉਭਰੇ ਜਿਨੀ ਸਤਿਨਾਮ ਚਿਤ ਲਾਇਆ ਜਿਹੜੇ ਮਨੁੱਖ ਨੇ ਉਹ ਹੀ ਖਾਦੇਗਾ ਨਾ ਪਰੇ ਤੋਂ ਮਾਇਆ ਤੋਂ ਗੁਰਮੁਖ ਹੀ ਰਾਦੇ ਗੁਰਮੁਖ ਤਾਂ ਆਪਣਾ ਜੋ ਕੰਮ ਕਰਨਾ ਹੈ ਉਹ ਕਰ ਰਹੇ ਨੇ ਗੁਰਮੁਖ ਬਾਜੇ ਬਾ ਮਾਇਆ ਨਾਲ ਬਾ ਦੇ ਪਿੱਛੇ ਆ ਗਏ। ਤਰਕੁਟੀ ਦੇ ਕਿ ਮਾਇਆ ਖਾ ਰਹੀ ਹੈ। ਇਹ ਤਰਕੁਟੀ ਜਿਹਨਾਂ ਨੇ ਛੱਡ ਕੇ ਦਸ ਸਾਲ ਖੁੱਲ ਗਿਆ ਉਹ ਬਚ ਗਏ। ਜਿਹੜੇ ਘਰ ਚ ਜਿਹੜੇ ਚਲੇ ਗਏ ਉਹ ਬਚ ਗਏ। ਗੁਰਮੁਖ ਦੇ ਘਰ ਚ ਰਹਿੰਦੇ ਨੇ ਤਰਕੁਟੀ ਸਾਰੇ ਖਾਦੇ ਨੇ। ਤਰਕੁਟੀ ਨੇ ਫਿਰ ਅੱਖਾਂ ਇਹ ਦੇਖੂਗਾ, ਸੱਨਾ ਤੈਨੂੰ ਸ਼ੁਰੂਗਾ, ਕੀ ਵਧਾ ਲਊਗਾ, ਸਾਰੀ ਸਾਰਥ, ਦੁਖ ਸੁਖ ਦਾ ਅਨੁਭਵ ਕਰੂਗਾ। ਇਹ ਜਿਹੜਾ ਸਾਰੀ ਦੁਖ ਸੁੱਖ ਸਭ ਕਰਕੇ ਜਲਣਾ ਫਿਰ ਲੋੜੇ ਨਹੀਂ ਜਿਨ ਸੱਚੇ ਲੋਗ ਚਿੱਤ ਲਾਇਆ ਨਾਮ ਦਾ ਹਿਰਦੇ ਚ ਬੁਣਾ ਜਿਨ ਨੇ ਚਿੱਤ ਸੱਚੇ ਲੋਗ ਨਾਲ ਲਾਇਆ ਨਾ ਚਿੱਤ ਲਾਇਆ ਲਿਖਿਆ ਬੁੱਧਲਾ ਕਹ ਲੱਗਦਾ ਚਿੱਤ ਸਾਥ ਰਹੇ ਚਿੱਤ ਨਹੀਂ ਲੱਗਦਾ ਪਹਿਲਾਂ ਬੰਨਦਾ ਹੀ ਧਿਆਨ ਕਰਦਾ ਜੋ ਕੋਮ ਨਾਮ ਹੈ ਜਿੱਤ ਵੀ ਆਪਾਂ ਕਬ ਕਰੀਏ ਅਕਾਸ਼ ਦੇ ਜਿਨਾ ਜਿਹੜੇ ਸਾਧਨੀ ਦਿੰਦਾ ਉਹ ਜ਼ੋਰ ਚ ਲੱਗਿਆ ਹੋਇਆ ਇਹ ਆਏ ਨੂੰ ਦੇਖ ਰਿਹਾ ਕੀ ਕਰਦਾ ਜਦ ਇਨਸਾਫ ਦਿੰਦਾ ਫਿਰ ਸੱਚ ਨਾਲ ਲੱਗ ਜਾਂਦਾ। ਦੇ ਬਿਨਾ ਜਦ ਕਮਲਾ ਹੋਇਆ ਫਿਰਦਾ। ਗਿਆਨ ਤੇ ਬਿਨਾ ਕਮਲਾ ਨਹੀਂ ਹੋ ਜਾ। ਸਭ ਜੀ ਨਹੀਂ ਹੈ ਨਾ ਕੀ ਕਰਨਾ ਹੈ ਕੀ ਕਰਨਾ ਹੈ ਕਰਿਆ। ਇਹ ਕਮਲਾ ਹੋਇਆ ਸਦਾ ਜੱਗ ਗੁਰਮੁਖਾਂ ਨੇ ਗੱਲ। ਸਭ ਜੀ ਲਈ ਗੁਰੂਖੰਦ ਨੂੰ ਸਮਝ ਆਈਏ ਇਸ ਗੱਲ। ਨਹੀਂ ਆਹਾਲ ਸਮਝ ਆਈ ਗੁਰੂਖੰਦ ਨੂੰ। ਗੁਰਮੁਖ ਕੋਹਾਂ ਹੈ ਬਵੇਕ ਬੁੱਧੀ ਵਾਲੇ ਨੇ ਜਿਹੜੇ ਗੁਰੂ। ਬਵੇਕ ਬੁੱਧੀ ਜੇ ਕਿਸੇ ਨੂੰ ਦੀ ਸੋਚੀ ਆ ਰਹੀ ਮਰਬਾਨੀ ਸਾਰੇ ਸੁਣਦੇ ਨੇ। ਉਹਦ ਬਦਲ ਗਈ ਜੀ ਦੀ। ਫਿਰ ਸੱਚ ਨਾਲ ਦੀ ਹੁਕਮਾਂ ਚ ਕਰਦਾ। ਫਿਰ ਉਹ ਲੋ ਆਤਮ ਗਿਆਨ ਦੀ ਕਮਾਈ ਕਰਦਾ। ਜਾਂਦੀ ਹੋ ਜਾਂਦਾ ਆਤਮਦਰਸ਼ੀ ਹੋ ਜਾਂਦਾ। ਹਾਂ ਤੰਦਾ ਕਰਤੇ ਆਂ ਨੇਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਤੰਦਾ ਕਰਤੇ ਆਂ ਬੇਵਰ ਜਨਮ ਗਵਾਇਆ ਇਹ ਲੋਕ ਚੱਕੇ ਆ ਆਦਮੀ ਤੇ ਫੋਕਲ ਬੀਰ ਪੁਸਤ ਆ ਆ ਆਦਮੀ ਕਰਤ ਕਰਦੇ ਨੇ ਉਹ ਤੰਦਾ ਨਹੀਂ ਹੈਗਾ ਤੰਦਾ ਨਹੀਂ ਆ ਜੋ ਤੁਸੀਂ ਕੰਮ ਕਰਦਾ ਤੰਦਾ ਨਹੀਂ ਉਦੋਂ ਉਦੋਂ ਕਰਦੇ ਆਂ ਯੋ ਤਮਾ ਬਦਿਆਂ ਸੁਖ ਪੁਣ ਸਾਰੀ ਉਦਮ ਕੰਮ ਕਮਾਈ ਕਰਦੀ ਮਾੜੀ ਚੱਲ ਰਹੀ ਹੈ ਪਰ ਇਹ ਧਰਮ ਨੂੰ ਧੱਗਾ ਬਣਾਉਣਾ ਜਿਹੜਾ ਹੈਗਾ ਇਹ ਮਾੜਾ ਸਾਰੀ ਕਾਜ ਨਹੀਂ ਹੋਵੇ ਸਾਰੀ ਲੋੜਾਂ ਵਾਸਤੇ ਹੀ ਸਮਝਦਾ ਹੋਵੇ ਜਿਵੇਂ ਅਸੀਂ ਸੁਝ ਰਹੇ ਅੱਜ ਅਰਦਾਸਾਂ ਕਰਦੇ ਆ ਜੋ ਵੀ ਕੁਝ ਕਰ ਰਹੇ ਆ ਮਾਇਆ ਵਾਸਤੇ ਕਰ ਰਹੇ ਸਭ ਸਾਰੀ ਲੋੜਾਂ ਵਾਸਤੇ ਅਸੀਂ ਕਿਸੇ ਕਰ ਰਹੇ ਆ ਧਰਮ ਨੂੰ ਇਹ ਅਰਦਾਸ ਕਰਦੇ ਆ ਧਰਮ ਧਰਮ ਪਰਪਕਾਰੀ ਚੀਜ਼ ਹੈ ਤੇ ਧਾਰਮਿਕ ਜਿਹੜੇ ਧਰਮ ਚੋਂ ਵੀ ਆਇਆ ਹੀ ਪਾੜਦੇ ਨੇ ਅੱਜ ਜਿਵੇਂ ਕਰਦੇ ਮਾਇਆ ਵਾਸਤੇ ਕਰਦੇ ਨੇ ਇਹ ਕਥਾਵਾਚ ਕਰਦੇ ਨੇ ਮਾਇਆ ਵਾਸਤੇ ਕਥਾ ਕਰਦੇ ਨੇ ਤੇ ਤੀਰਤ ਨਾਲੇ ਨੇ ਮਾਇਆ ਵਾਸਤੇ ਕਰਦੇ ਨੇ ਇਹ ਸਭ ਤੋਂ ਧਰਮ ਨੇ ਭਗਤਾਂ ਨੇ ਨਹੀਂ ਇਹ ਤਾਂ ਕੀਤਾ ਦੁਨੀਆਂ ਨੇ ਨਹੀਂ ਕਰਦਾ ਕੀਤਾ ਜੇ ਵਣ ਜਨੂ ਗਵਾਇਆ ਜੇ ਧੱਜ ਲੱਗੇ ਨਾ ਉਹਨਾਂ ਨੇ ਜਨੂ ਗਵਾ ਲਿਆ ਫਲ ਨਹੀਂ ਹੋਇਆ ਪ੍ਰਾਪਤ ਹੋਇਆ ਫਲ ਕੀ ਪ੍ਰਾਪਤ ਹੋਣਾ ਸੀ ਫਲ ਗਿਆਨ ਪ੍ਰਾਪਤ ਹੋਣਾ ਗਿਆਨ ਕਿਹਦਾ ਆਤਮ ਗਿਆਨ ਫਲ ਹੈ। ਕਾਣ ਕੁ ਗੁਰ ਸਬ ਤੋਖ ਰੁਖ ਕਾਣ ਮ ਫੁੱਲ ਫਲ ਗਿਆਨ। ਜਿੱਤੇ ਫਲ ਆਉਣਾ ਫਿਰ ਸਾਡੇ ਕੋਲ ਗੁਰਬਾਣੀ ਤੇ। ਗਿਆਨ ਅਰਥ ਲਭਉਂ ਜੇ ਫਲ। ਗਿਆਨ ਹੀ ਗਿਆਨ ਤੋਂ ਸਥਨ ਰਹਿ ਜਾਂਦੇ ਨੇ। ਦੇਹ ਭਗਤ ਜਨ ਕੋ ਆਇਆ। ਸੁਖ ਦਾ ਆਤਾ ਕਿਉਂਕਿ ਉਹਨਾਂ ਨੇ ਸੁੱਖਾ ਨੂੰ ਦੇਣ ਵਾਲਾ ਜਿਹੜਾ ਹੈਗਾ। ਸੁੱਖਾਂ ਦਾ ਆਤਮ ਵੀ ਬਸਾਇਆ, ਗੁਰ ਵਿੱਚ ਵੀ ਬਸਾਇਆ। ਹਾਂਜੀ। ਨਾਨਕ ਨਾਮ ਤੇਨਾ ਕੋ ਮਿਲਿਆ ਜਿੰਨ ਕੋ ਧੁਰ ਲਿਖ ਪਾਇਆ ਨਾਲੇ ਨਾ ਮਤਵਨ ਨੂੰ ਵੜਿਆ ਜੀਣਾ ਸੁਰ ਆਪਣੇ ਅੰਦਰ ਹਿਰਦੇ ਵਿੱਚ ਲਿਖ ਲੈ ਆ ਵੀ ਕੀ ਹੋਰ ਕੁਛ ਸਭ ਲੋਕ ਨੇ ਕੇ ਪਾ ਨੂੰ ਉਸੇ ਤੇ ਡਰਣਾ ਕੁਇਰ ਕਹਿੰਦਾ ਜੋਗੀ ਨੂੰ ਸਿਖਾਉਂ ਮੈਂ ਜਾਉਂਦਾ ਵੀ ਚਾਹੇ ਪੂਰਾ ਹੀ ਬਰਦਲੈ ਮੈਨੂੰ ਰੋਕੀ ਵੀ ਨਾ ਮਰੇ ਜਾਉਂਦਾ ਜੀ ਚਾਹੇ ਮੈਨੂੰ ਮਰੂ ਪੁਰਤੀ ਹੋ ਵਾਸਤੇ ਪਰ ਉਹ ਮੈਂ ਰਾਮ ਦੀ ਨਹੀਂ ਜਾਣੀਆ ਇਹ ਨਹੀਂ ਜਨਨਾ ਰਾਹ ਦੀ ਜਨ ਠੀਕ ਹੈ ਜੀ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾ ਸੁਆਦ ਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਭੁਲਾਇਆ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵਿਸਰਾਮ ਉਹ ਦਰੋ ਬਲਣਾ ਨਾਮ ਤਾਂ ਸਾਰਿਆਂ ਨੂੰ ਬਾਦ ਮਿਲਦਾ ਹੁੰਦਾ ਦੇ ਸਕਦਾ ਜੇ ਬਾਹਰੋਂ ਆਉਂਦੇ ਜ ਸਕਦਾ ਉਹ ਤਾਂ ੱਦੇ ਵਾਲੇ ਦੇ ੱਦਾ ਨੂੰ ਪਾਉ। ਉਹ ਬਾਹਰੋਂ ਜਿਹੜੇ ਦੰਦੇ ਨੇ ਉਹ ੱਦਾ ਬਾਹਰੋਂ ਮਿਲ ਸਕਦਾ ਸਾਨੂੰ ਗਿਆਨ। ਗਿਆਨ ਵੀ ਦੱਸਿਆ ਜਾ ਸਕਦਾ ਦਿੱਤਾ ਵੀ ਜਾ ਸਕਦਾ। ਟੀਚਰ ਬੋਲ ਕੇ ਨਾ ਸਮਝਿਆ ਤਾਂ ਸਟੂਡੈਂਟ ਐਟ ਬੈਂਟ ਕਰਦਾ। ਹਾਂਜੀ। ਬੁੱਝਣਾ ਨਾ ਬੁੱਝਣਾ। ਜਿਹਨੇ ਮੰਨ ਲਿਆ ਉਹਨੇ ਲੈ ਲਿਆ ਜਿਹਨੇ ਬੁੱਝੇ ਨਹੀਂ ਉਹ ਲਿਆ। ਕਾਲੇ ਹੀ ਮਾਂ ਪਰ ਪ੍ਰਭੂ ਹੈ। ਬਾਹਰੋਂ ਤਾਂ ਲੈਣਾ ਨਾ ਲੈਣਾ ਸਾਡੀ ਮਰਜ਼ੀ ਤੇ। ਅੱਲਾਹ ਨੇ ਕਿਸੇ ਨੂੰ ਛੱਡਿਆ ਅਜੇ ਤੱਕ ਜੀ ਨੂੰ। ਦੱਲਾ ਛੁੱਟੇ ਨਹੀਂ ਸਕਦਾ ਉਹ ਤੇ ਜੋਦੀ ਆਉਂਦੀ ਆ ਉਹ ਸਾਰੇ ਲੈ ਲੈਂਦੇ ਨੇ ਉਹ ਡੜੀ ਪੈਂਦੀ ਆ ਸਾਰੇ ਨਾਮ ਅੰਬਰ ਤੇ ਭਰਪੂਰ ਹੈ ਮਨੁੱਖਾਂ ਸਾਤਨ ਪਾਯੋ ਮਨੁੱਖ ਦਾ ਬਾਹਰੋਂ ਡੋਲ ਬੈਠੇ ਨੇ ਮਨੁੱਖ ਬਾਹਰ ਹੋਈ ਸਾਰਾ ਕੁਝ ਜੁੜੇ ਹੋਣੇ ਤੇਰੇ ਕੁਲੀ ਵਾਲੇ ਬਾਹਰ ਜੁੜੇ ਹੋਣ ਗੁਰੂ ਵੀ ਬਾਹਰ ਨੇ ਉਹਨਾਂ ਦੇ ਉਹਨਾਂ ਨੂੰ ਟੈਸਟ ਨਹੀਂ ਆਇਆ ਉਹਨਾਂ ਨੂੰ ਹੀ ਪਤਾ ਲੱਗਿਆ ਕਿ ਅੰਦਰ ਹੈ ਸਾਡੇ ਪਹਿਲਾ ਤਰਾਕ ਵਜੀ ਹੋ ਆ ਜਾ ਜਿਹਦੇ ਚੱਲੀਏ ਫਿਰ ਅੱਗੇ ਵਧਦਾ ਜਾਂਦਾ ਹੈ এবੀ ਸੀ ਤੋਂ ਸਟਾਰਟ ਹੁੰਦਾ ਪੜਨਾ ਦੇ ਹੜੀ ਦਾ ਬੱਚੇ ਦਾ ਆ ਪੜਦਾ ਚੱਲਾ ਜਾਂਦਾ ਗਾਂ ਤੋਂ ਗਾਂ ਪੜਾਈ ਵਧੀ ਜਾਂਦੀ ਹੈ ਠੀਕ ਕਸਤੂਰੀ ਮਿਰਗ ਪਤਾ ਵਿਚਰੇ ਅੰਦਰ ਹੈ ਉਹ ਪੱਠਿਆ ਫਿਰਦਾ ਕਸੂਰੀ ਮੈਂ ਲੋ ਜਾਂਦਾ ਵੀ ਦਾ ਨੇ ਤੋਂ ਦੇ ਵਿੱਚ ਆਪਣੀ ਜੀ ਸਾਰੇ ਲੋਕੀਓ ਜੇ ਟੋਲ ਦੇ ਬਾਹਰ ਫਿਰਦੇ। ਇਸ ਕਰਕੇ ਭੁੱਲੇ ਫਿਰਦੇ ਸਾਰੇ ਲੋਕ। ਨਾ ਉਹ ਦਰਹਿ ਟੋਲ ਦੇ ਬਾਹਰ ਹੁੰਦੇ। ਠੀਕ ਹੈ। ਹਮੇਤ ਤਜ ਬਿਖ ਸੰਗ ਰਹਿ ਕਰਤਾ ਆਪ ਖੁਆਇਆ। ਗੁਰਮੁਖ ਵਿਰਲੇ ਸੋਝੀ ਪਈ। ਤੇਨਾ ਅੰਦਰ ਬ੍ਰਹਮ ਦਿਖਾਇਆ। ਕਰਤਾ ਪਰ ਜਿਹੜਾ ਅਮਰਤਲ ਆਤਮਾ ਦੀ ਆਵਾਜ਼ ਛੜਪੀ। ਆਹ ਮਾਇਆ ਕਠੀ ਕਰਨਾ ਦੇ। ਦੇਖ ਮਾਇਆ ਨੂੰ ਬਹਿਣ ਪਰ ਘੜੀ ਮਾਰਿਆ ਧੰਨ ਇਕੱਠਾ ਕਰਨ ਲੱਗੇ ਇਹ ਸਰੀਰ ਦੇ ਕੰਮ ਆਊਗਾ ਇਹ ਆਪਣੇ ਹੋਰ ਅਦਭੁਤ ਦੇ ਕੰਮ ਨਾ ਦੀਜਾ ਇਹ ਜਿਹੜੇ ਹੋਰ ਕੰਮ ਕਰਦੇ ਵੀ ਨਾ ਪਰਸ ਤੇ ਅਲਾਵਾ ਜਿਹੜੇ ਗੁਰਮਖਨੇ ਨੇ ਗੁਰਮਖੇ ਧੂਣਦੇ ਨੇ ਹਰ ਰਾਮ ਰਾਜੇ ਹਰ ਸੱਜਣ ਉਹਨਾਂ ਨੇ ਲੱਭ ਲਿਆ ਆਪਣੇ ਉਹ ਤੋਂ ਬਿਨਾਂ ਕਿਨੇ ਤਾਂ ਆਪਣੇ ਅੰਦਰ ਲੱਭਨੇ ਹਰ ਸੱਜਣ ਬਾਹਰ ਧੰਨ ਇਕੱਠਾ ਕਰੀ ਜਾਂਦੇ ਕਰਤੇ ਆਪ ਖਵਾਇਆ ਇਹ ਸਤਿਗੁਰੂ ਵੀ ਉਹ ਉਲਟੇਰਾ ਆਪੇ ਪਾਇਆ ਹੋਇਆ। ਫੇਖੋਗੇ ਪਾਇਆ ਦੇ ਵਿੱਚ ਖੋਗੇ। ਹੈ ਜੀ। ਪਈ ਤੇ ਨਾ ਅੰਦਰ ਬ੍ਰਹਮ ਦਿਖਾਇਆ। ਪਰ ਵਿਰਲੇ ਕੋਈ ਮਖ ਨੂੰ ਜੋਜੀ ਹੁੰਦੀ ਆ ਵੀ ਨਾ ਅੰਦਰ ਬ੍ਰਹਮ ਦਿਖਾਇਆ ਉਹਨਾਂ ਨੇ ਅੰਦਰ ਹੀ ਆਪਣਾ ਬ੍ਰਹਮ ਦਾ ਦਰਸ਼ਨ ਕਰ ਲਿਆ। ਆ ਆਪਣੀ ਦਾ ਬ੍ਰਹਮ ਕਵਣਾ ਆਪਣਾ ਗੂੜ। ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸੁਆਦ ਆਇਆ ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਜਿਹਨਾਂ ਬਰਮਖਾਨੇ ਅੰਦਰ ਪਰ ਦੇਖਦੇ ਆਪ ਜਾਨ ਲਿਆ ਉਹਨਾਂ ਦਾ ਤਨਬੁੱਤੀ ਚਲੋ ਜਾਂਦਾ ਰਸਨਾ ਹਰ ਸੁਆਦ ਆਇਆ ਉਹਨਾਂ ਦੀ ਰਸਨਾ ਉਹਦੀ ਪਰ ਕੀ ਹੈ ਜੋਤ ਦਾ ਜਿਹੜਾ ਗਿਆਨ ਹੈ ਉਹਦਾ ਸੁਆਦ ਆ ਜਾਂਦਾ ਇਸ ਹੀ ਨਾ ਹੀ ਨਾ ਬਿਲਕੁਲ ਆਇਆ ਜਵਤੇ ਜਿਹੜਾ ਆਪੇ ਸਾਹ ਕੁਰਬਾਨੀ ਚੋਪ ਦੇ ਦੇ ਸੇਖੋ ਜੀ ਹੂੰ ਇਹ ਤੋਂ ਨਾਮ ਇਹਦੇ ਵਿੱਚ ਲੋ ਪੈਦਾ ਹੁੰਦਾ ਨਾ ਇਹ ਤੋਂ ਗਿਆਨ ਪੈਦਾ ਹੁੰਦਾ ਇਹ ਤੋਂ ਗਿਆਨ ਪ੍ਰਾਪਤ ਹੁੰਦਾ ਸ਼ਬਦੇ ਹੀ ਨਾ ਉਪਜਾ ਸ਼ਬਦੇ ਮੇਲ ਬੁਲਾਇਆ ਇਹ ਸ਼ਬਦ ਇੱਕ ਵਾਰ ਦੀ ਕਿਤੇ ਤੋਂ ਸ਼ਬਦ ਉਪਦੇਸ਼ ਨਾਲ ਇੱਕ ਵਾਰੀ ਕਿਤੇ ਤੋਂ ਦੁਆ ਨਾਲ ਮਿਲ ਉਹਦੇ ਬਾਅਦ ਕੋਈ ਤੇ ਉਦੋਂ ਪੈਦਾ ਹੋਣਾ ਨਾ ਸਬਦੀ ਪ੍ਰਾਪਤੀ ਫਿਰ ਬਾਅਦ ਚ ਹੋਣੀ ਹੈ ਬਿਨ ਸ਼ਬਦ ਹੈ ਸਭ ਜਗ ਬੋਰਾਨਾ ਬਿਰਥਾ ਅੰਮ੍ਰਿਤ ਇੱਕੋ ਸ਼ਬਦ ਨਾਨਕ ਗੁਰਮੁਖ ਪਾਇਆ ਕੁਰਬਾਨੀ ਦਾ ਉਪਦੇਸ਼ ਜੇ ਬਿਲਕੁਲ ਫਿਰ ਸ਼ਬਦ ਜਗ ਬੋਰਾਨਾ ਬੋਰਾਨਾ ਵੀ ਪਾਗਲ ਹੋਇਆ ਫਿਰਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਆਪਣੀ ਆਪਣੀ ਭੱਟਾ ਉਹਨਾਂ ਬੱਟਾ ਵੀ ਲੋਕ ਲੱਗੇ ਇਸ ਕੁਰਬਾਨੀ ਦੇ ਉਪਦੇਸ਼ ਜਗ ਕਬੜਾ ਹੋਇਆ ਫਿਰਦਾ ਬੋਰਾਨਾ ਵਿਰਥਾ ਗਿਆਨ ਕੋ ਆਇਆ ਦਾ ਗਿਆਨ ਕੋ ਵਾਲੇ ਕੇ ਗੁਰਮਤਿ ਨੂੰ ਗੁਰਬਾਨੀ ਨੇ ਜਿਹੜੇ ਪਾਗਲ ਸਾਰੇ ਜੱਗੇ ਪਾਗਲ ਵਿਰਥਾ ਕੋਈ ਬਿਰਲਾ ਗੁਰਮਖ ਹੈ ਬਾਕੀ ਜਗੇ ਸਾਰੇ ਪਾਗਲ ਹੈ ਪਾਗਲ ਦਾ ਬਹੁਤ ਆ ਕੀਤਾ ਹੈ ਅੰਮ੍ਰਿਤ ਇੱਕੋ ਸ਼ਬਦ ਹੈ ਨਾਮ ਗੁਰਮੁਖੀ ਪਾਇਆ ਜਿਹੜਾ ਇੱਕੋ ਸ਼ਬਦ ਹੈ ਨਾ ਕਿਸੇ ਗੁਰਦ ਵਰਤ ਕੀ ਹੈ ਉਪਰਤ ਗੁਰਬਾਣੀ ਦਾ ਸ਼ਬਦ ਇੱਕੋ ਗੱਲ ਹੈ ਸਾਰਿਆਂ ਦੀ ਇਹ ਵੀ ਚਾਹੇ ਜਿਵੇਂ ਬੰਕਾਰ ਉੱਪਰ ਜੀ ਗੱਲ ਕੀਤੀ ਗੱਲ ਇੱਕੋ ਹੀ ਹੈ ਸਾਰਿਆਂ ਦੀ ਔਰ ਜਿਹੜਾ ਇੱਕੋ ਸ਼ਬਦ ਉਪਰਤ ਨਾਮ ਹੈ ਉਹ ਵੀ ਇੱਕੋ ਹੀ ਸ਼ਬਦ ਹੈ ਨਾਮ ਇੱਕ ਗੁਰਮੁਖੀ ਪਾਇਆ ਗੁਰਮੁਖੀ ਦੀ ਪ੍ਰਾਪਤੀ ਸੁਭਿਅ ਹੈ ਗੁਰਮੁਖਾ ਦੀ ਪ੍ਰਾਪਤੀ ਇੱਕੋ ਸ਼ਬਦ ਦੱਸੋ ਕੀ ਭਾਵ ਹੈ ਵੀ ਕੋਈ ਇੱਕ ਸ਼ਬਦ ਦੀ ਗੱਲ ਹੋ ਰਹੀ ਹੈ ਕੋਈ ਕੋਈ ਅੱਖਰ ਹੈ ਕਿ ਕੀ ਇਹ ਗੱਲ ਹੈ ਇੱਕੋ ਜਿਹੜਾ ਗੱਲ ਹੈ ਇਹ ਇੱਕ ਹੋਰ ਗੱਲ ਹੈ ਹੋਰ ਗੱਲ ਕੋਈ ਹੈ ਹੂੰ ਕੋਈ ਦੇਖੋ ਨਾ ਕੀ ਢੇਰ ਪਿਆ ਉਹ ਇੱਕ ਪਾਸੇ ਤੋਲ ਕੇ ਦੇਤੀ ਉਹ ਕਹਿੰਦਾ ਨਹੀਂ ਮੈਨੂੰ ਤਾਂ ਇਦਾਂ ਹੋਵੇ ਤੇ ਉਹ ਕਹਿੰਦਾ ਦੇ ਤਾਂ ਕਹਿੰਦਾ ਇਹ ਵੀ ਗੱਲ ਐ ਦੀ ਗੱਲ ਇੱਕੋ ਜੀ ਸਾਰੇ ਦਰਾਂ ਦੀ ਐ ਦੇ ਅਬਦੂ ਦੀ ਵਿਚਾਰ ਕਰ ਲਈਏ ਉਹਦੇ ਇਹਨੇ ਜੋ ਨਾਮ ਦੀ ਪ੍ਰਾਪਤੀ ਹੈ ਕਿਸੇ ਦੀ ਬਾਣੀ پڑھ ਲਓ ਕਿਦੋਂ پڑھ ਲਓ ਉਹੀ ਗੱਲ ਹੈ ਸਾਰੀ ਠੀਕ ਹੈ ਜੀ ਸ਼ਬਦਾਂ 'ਚ ਵੀ ਫਰਕ ਪਾਇਆ ਜੀ ਉਹ ਧੱਗੇ ਵਾਲੇ ਨੇ ਸਾਰੇ ਲੋਕ ਹਾਂਜੀ ਪੌੜੀ ਸੋ ਹਰ ਪੁਰਖ ਅਗੰਮ ਹੈ ਕੋਹ ਕਿਤ ਮੇਦੀ ਪਾਈ ਹੈ ਕਿਸ ਰੂਪ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਹੈ ਦੇਖੋ ਕਹਾਂ ਕਿ ਮੇਰੇ ਆਂ ਅੰਤਰਾਟਬੋ ਦੀ ਹੂੰ ਹੂੰ ਉਹ ਕਹਾਂ ਜਿਆ ਅਗਰ ਪਹਿਲੀ ਸਕਦੀ ਬੁੱਧੀ ਉਸ ਚੀਜ਼ ਦੀ ਕਲਪਨਾ ਕਰਦੀ ਹੈ ਜੋ ਇਹਨੂੰ ਦਿਨ ਦੇ ਸੰਪਰਕ ਤੇ ਇਹ じゃ ਕੁਝ ਵੀ ਨਹੀਂ ਹੈ ਬਾਹਰ ਸੰਸਾਰ ਤੇ ਉਹ ਹੈ ਅਗਰ ਬੁੱਧੀ ਤਾਂ ਪਰੇ ਹੈ ਪਰ ਬੁੱਧੀ ਤਾਂ ਪਰੇ ਹੈ ਮਨ ਉਦੀ ਕਲਪਨਾ ਵੀ ਨਹੀਂ ਕਰ ਸਕਦੇ ਉਹ ਆਪ ਗੋ ਕਹੋ ਕਿ ਤਬਿੱਦੀ ਪਾਈ ਹੈ ਹਾਂ ਕਹੋ ਕਿ ਦੱਸੋ ਕਿ ਕਿਹੜੀ ਬਿੱਦੀ ਨਾਲ ਉਹਦੀ ਪ੍ਰਾਪਤੀ ਕਰੀਏ ਕਿਵੇਂ ਪਹੁੰਚਿਓ ਰਿਹਾ ਕਹੋ ਕਿ ਅਦਮਿਤ ਪਾਈ ਹੈ ਹਾਂਜੀ ਤੇ ਜਦੋਂ ਉਹ ਪਨ ਰੇਖ ਅਦ੍ਰਿਸ਼ ਹੈ ਉਹਦੀ ਰੂਪ ਦ੍ਰਿਸ਼ਟੀ ਤੋਂ ਪਰੇ ਹੈ ਸਾਡੀ ਦੇਖਾ ਤੋਂ ਪਰੇ ਹੈ ਅਦ੍ਰਿਸ਼ ਹੈ ਕਾ ਜਾਨਿਕਮ ਤੇ ਆਈਏ ਦੱਸੋ ਬਈ ਤੇ ਬਿਓ ਦਾ ਧਿਆਨ ਕਰੀਏ ਜਦੋਂ ਆ ਜਦ ਧਿਆਨ ਕੋਈ ਚੀਜ਼ ਦੀ ਸਮਝਣਾ ਆ ਜੇਖਣਾ ਲਈਏ ਧਿਆਨ ਵੀ ਲਿਆ ਜਾ ਸਕਦਾ ਇਹ ਧਿਆਨ ਕਰੋਗੇ ਬਿਨਾ ਦੇਖੇ ਬਿਨਾਂ ਜਾਣੇ ਬਿਨਾ ਸਮਝੇ ਉਹ ਇਮੇਜਿਨੇਸ਼ਨ ਦੀ ਗੱਲ ਹੈ ਧਿਆਨ ਨਹੀਂ ਹੈ ਉਹ ਇਮੇਜਿਨੇਸ਼ਨ ਇਹ ਜਿਹੜੀ ਤੁਹਾਨੂੰ ਸਾਰੇ ਕਲਪਨਿਕ ਇਸ ਕਰਕੇ ਜਿਹਦੀ ਮਤਲਬ ਸਭ ਕਲਪਨਿਕ ਨੇ ਇਮੇਜਿਨੇਸ਼ਨ ਕਿਸਨਾ ਕੋਈ ਮਾਝੇ ਕਰ ਲੈ ਅਗੇ ਕਿਸ ਕਰ ਲੈ ਤੇ ਕੁਛ ਕਰ ਲੈ ਤੇ ਕੁਛ ਕਰ ਲੈ ਆਪ ਆਪੜੀ ਬੁੱਧ ਹੈ ਜੇਤੀ ਬੜਲ ਦੇ ਪੈ ਨਿਪੁਰਤਿ ਆਦਿਨਾ ਤੇ ਆਂ ਮੈਂ ਤਾਂ ਰਿਐ ਜਿਦਾ ਰੂਪ ਰੇਖੂ ਥਈ ਦੀ ਤੇ ਦੇਖਿਆ ਨਹੀਂ ਆ ਸਕਦਾ ਉਹਦਾ ਧਿਆਨ ਕੌਣ ਤਰੂ ਗੋਥੇ ਮੈਂ ਤਰਿਆ ਜਿੰਨਾ ਅਚਰ ਗਿਆਨ ਨਹੀਂ ਹੈ ਤੇ ਆ ਨਹੀਂ ਹੋ ਸਕਦਾ ਗਿਆਨ ਧਿਆਨ ਗਿਆਨ ਪਹਿਲਾਂ ਧਿਆਨ ਵਾਸਤ ਤਰਿਆ ਜਾਊ ਇਸ ਕਰਕੇ ਗੁਰਬਾਣੀ ਗਿਆਨ ਕਰਾ ਰਹੀ ਹੈ ਅਰ ਮੈਂ ਉਹ ਇਹ ਜਿਹੜਾ ਗਿਆਨ ਕਰਾਵੇ। ਕਿਹ ਗਿਆਨ ਹੈ ਧਰਮ ਹੈ। ਉਹ ਧਰਮ ਹੈ ਨਹੀਂ ਸਿਰਫ ਜਿਹੜਾ ਗਿਆਨ ਦੀ ਕਰਾ ਰਿਹਾ ਹੈ ਪਹਿਲੋ। ਜਿਹਦਾ ਗਿਆਨ ਹੋ ਜੂਗਾ ਸਮਝ ਆ ਜੂਗੀ ਇਸ ਕਰਕੇ ਕੋਈ ਯੋਗੀ ਸਫਲ ਨਹੀਂ ਹੋਇਆ। ਕੋਈ ਸਕਦਾ ਸਫਲ ਹੋ ਰਸਤਾ ਗਲਤ ਹੈ। ਠੀਕ ਹੈ ਜੀ। ਹਮ। ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਏ ਜਿਹੜਾ ਕੇ ਗੁਣ ਗਾਇਨ ਕਰੂਗੇ ਰਤ ਜੇ ਨਾ ਸਿਰ ਸਮਝਦੀ ਸਮਝ ਕੇ ਤਾਂ ਸਕਦੇ ਹੋ ਜਿੰਨਾ ਚਿਰ ਉਹ ਸਮਝੇ ਨਹੀਂ ਦਰਸ਼ਣਾ ਨਹੀਂ ਕਿਵੇਂ ਗੁਣ ਗਾਇਨ ਕਰੂਗਾ ਠੀਕ ਹੈ ਜੀ ਤੁਹਾਡੀਆਂ ਸਾਰੀਆਂ ਗੱਲਾਂ ਕੁਰੀਆ ਗੁਰੂ ਤੇਰੀ ਯਾਦ ਦੇ ਪਰ ਗੁਰਬਾਨੇ ਦੇ ਵਿੱਚ ਸੋ ਬੋਲਣ ਤੋਂ ਪਿੱਛੇ ਅੰਥੀ ਇਹ ਨਾਲੇ ਦੇਖ ਕੇ ਆਪ 부ਝਾਏ ਆਪ ਜਿਸ ਆਪ ਬੁਜਾਏ ਆਪ ਅਸਲ ਜੁਗਨਾ ਦੀ ਆਪੇ ਆਪਣੇ ਆਪ ਨੂੰ ਪਛਾਣਾ ਆਪਣੇ ਆਪ ਨੂੰ ਸੁਝਣਾ ਆਤਮਾ ਚੇਤਨਾ ਕੋ ਕੋ ਨੇ ਕਿਵੇਂ ਆਪਾਂ ਕਿਦੇ ਮੇਰੇ ਨਾ ਭਗਤੀ ਚਾਈ ਇਹ ਦੇਖ ਭਗਤੀ ਹੈ ਆਪਣੀ ਭਗਤੀ ਹੈ ਆਪੇ ਜੇ ਆਪਣਾ ਜ ਤਵਾ ਕੇ ਸਾਰੀ ਲੈ ਨਹੀਂ ਉੱਡੀ ਹੋਗੀ ਸਾਡੀ ਜਰਮਾਤ ਵਾਓ ਭਾਰੋ ਟੋੜਦੇ ਨੇ ਇਹ ਆਪਣੇ ਆਪ ਨੂੰ ਟੋੜਨੇ ਤੇ ਆਪੇ ਨਾ ਕਰਾ ਜਦ ਇਹ ਆਪੇ ਇੱਕ ਆਪਣੀ ਸਮਝ ਆ ਠੀਕ ਹੈ ਜੀ ਤੁਸੀਂ ਆਪੋ ਆਪ ਉਹ ਆਪਣਾ ਆਪ ਆਪ ਬੁਝਾ ਲਵੇ ਮਰਵਾਣੀ ਆਪਣਾ ਆਪ ਹੀ ਬੁਝਾ ਰਹੀ ਹੈ ਤੁਹਾਨੂੰ ਕਪਈਆ ਉਹ ਉਹ ਹਰ ਕੇ ਮਾਰ ਕੇ ਚੱਲਦਾ ਹਰ ਕਾ ਮਾਰ ਕੇ ਡਰਾ ਗਾਰੀ ਮਾਰਦਾ ਹਰ ਕਾ ਮਾਰਦਾ ਡਰਾਕਾਰ ਦਾ ਮਾਰਦਾ ਹੈ ਲੋ ਮੁਖੀ ਕਰਦਾ ਬਾਹਨ ਦੀ ਬਾਹਰ ਬਣਾਤਾ ਉਹ ਦੁਵਾਰ ਦਾ ਤਾਂ ਦਰ ਹੁੰਦਾ ਬਾਹਰ ਕਿੱਥੇ ਹੁੰਦਾ ਛੋੜੀ ਛੱਡੀ ਮਾਰ ਲਈ ਤੋ ਸੀ ਤੋ ਠੀਕ ਹੈ ਜੀ ਉਹ ਦੁਵਾਰ ਬਣਾਤਾ ਬੜਪੂ ਸੇ ਤੋ ਚਲੋ ਗੁਰਪੂਰੇ ਵਿਖਾਲਿਆ ਗੁਰਸੇਵਾ ਪਾਈਏ ਗੁਰਪੂਰੇ ਹੋ ਗਈ ਦੁਧ ਪੂਰੀ ਹੋ ਗਈ ਫਿਰ ਸਮਝ ਆਈ ਫਿਰ ਵਿਖਾਲਿਆ ਪੂਰੇ ਗਿਆਨ ਦੀ ਰੋਸ਼ਨੀ ਜਦ ਦੇਖਿਆ ਆਪਣਾ ਗੁਰਬਾਣੀ ਦਾ ਪੂਰਾ ਗਿਆਨ ਅਸੀਂ ਪ੍ਰਾਪਤ ਨਹੀਂ ਕਰ ਲੈਂਦੇ ਆ ਦਰਸ਼ਨ ਨਹੀਂ ਹੋ ਸਕਦਾ ਗੁਰਸੇਵਾ ਪਾਈ। ਗੁਰਸੇਵਾ ਕੀ ਹੈ ਗੁਰ ਸ਼ਬਦ ਵਿਚਾਰ। ਫਿਰ ਤਾਂ ਗੁਰਸੇਵਾ ਪ੍ਰਾਪਤੀ ਦੀ ਹੁੰਦੀ। ਦੀ। ਸ਼ਬਦ ਵਿਚਾਰ ਤੋਂ ਵੀ ਪ੍ਰਾਪਤੀ ਹੈ, ਸਾਰੇ ਗਿਆਨ ਦੀ। ਗੁਰਸੇਵਾ ਕਰ ਕੇ ਹੁਣ ਸ਼ਬਦ ਵਿਚਾਰ ਚੋਂ ਪ੍ਰਾਪਤੀ ਹੈ। ਕਿ ਗੁਰਬਾਣੀ ਨੂੰ ਵਿਚਾਰਾਂਗੇ, ਇਹਦਾ ਪੂਰਾ ਗਿਆਨ ਅਸੀਂ ਪ੍ਰਾਪਤ ਵੀ ਕਰ ਲਾਂਗੇ। ਇਹ ਦੁੱਧ ਆ ਇਹਨੂੰ ਰਿੜਕਾਂ ਪੂਰਾ ਤਾਂ ਪੂਰਾ ਮੁੱਠਲ ਵੀ ਪ੍ਰਾਪਤ ਕਰ ਲਾਂਗੇ। ਜੀ। ਠੀਕ ਹੈ ਜੀ। ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ ਜੀ